ਸਾਧਕੇ ਸੰਗੀ ਸਭ ਕੋ ਉਧਾਰੇ ਆਪਣੇ ਸੰਦੇ ਨੂੰ ਸਾਧਕੇ ਬੰਦੂ ਸਾਧਕੇ ਜਦੋਂ ਅਕਲ ਜਿਹੜੀ ਆਪਣੀ ਬੁੱਧ ਹੈ ਬੰਦੂ ਸਾਧ ਲੈਂਦੀ ਹੈ ਬੰਦੂ ਸਮਝਾ ਲੈਂਦੀ ਹੈ ਮਨ ਅਧਾ ਸਾਧਾ ਮਾਨ ਅਕਲ ਦੇ ਪਿੱਛੇ ਲੱਗਦਾ ਅਕਲ ਜੋ ਫੈਸਲਾ ਕਰਦੀ ਹੈ ਉਹ ਮਨ ਝੱਟ ਮੰਨ ਲੈਂਦਾ ਹੈ ਪੋੜੀ ਅਕਲ ਤੋਂ ਬਾਤ ਪੁੱਛਣਾ ਪਹਿਲਾਂ ਮਨ ਆਪਣਾ ਫੈਸਲਾ ਕਰਦਾ ਵੀ ਅੱਜ ਹੀ ਜਾਂ ਕੱਲ ਦੀ ਅਕਲ ਤੋਂ ਬਾਤ ਚ ਦੱਸਦਾ ਹਮਮ ਅਕਲ ਤੋਂ ਬਾਤ ਕਰਕੇ ਪੁੱਛਦਾ ਤਾਂ ਪੁੱਛਦਾ ਹੀ ਨਹੀਂ ਤੇ ਜੇ ਮਨ ਸਾਧ ਲਿਆ ਉਹ ਜਿੰਨੀਆਂ ਵੀ ਦੁਨੀਆਂ ਦੀਆਂ ਬੱਤਾਂ ਨੇ ਸਾਰਿਆਂ ਦਾ ਉਦਾਰ ਕਰ ਸੋ ਸਾਰੀਆਂ ਬੱਤਾਂ ਆਪਸਾ ਕਰਕੇ ਫਸੀਆਂ ਹੋਈਆਂ ਨੇ ਛੁਟਣਾ ਨਹੀਂ ਜਾਣਦੀਆਂ ਤੇ ਪਰ ਦੀ ਤ੍ਰਿਧੀ ਛੱਤਮ ਦੀ ਐਸੀ ਹੁਣ ਜਹਾਲੀ ਉਹਨੇ ਉੱਡ ਗਈ ਕੋਈ ਨੂੰ ਸਮਝ ਨਹੀਂ ਆ ਰਿਹਾ ਕਿ ਛੱਟਦਾ ਰਹੂ ਕਿਉਂ ਲਾਲਚ ਲੋਭ ਤਿਆਗ ਕਰ ਦੇ ਦੀ ਮੋਹ ਦਾ ਤਿਆਗ ਕਰ ਦੇ ਦੀ ਇਹਦੇ ਕਰੇ ਬਿਨਾ ਛੁਟਕਾਰਾ ਹੋਣਾ ਨਹੀਂ ਉਹ ਮਤਲਬ ਉਹ ਨਾਲ ਹੈ ਵੀ ਇਸ ਤਰ੍ਹਾਂ ਕਰੰਟ ਹੋਈ ਨਾ ਢੂ ਡੂ ਰਹਿ ਜਾਣਾ ਉਹ ਦੋਹਿਆਂ ਤੇ ਨਾ ਡੂ ਰਹਿਣਾ ਕਿ ਕਮਜ਼ੋਰੀਆਂ ਨੂੰ ਬਤਾਉਂਦਾ ਉਹਨਾਂ ਤੇ ਉਹਨਾਂ ਦਾ ਉਹ ਆਖਾਂ ਕਰਵਾ ਕੋਈ ਵੀ ਆ ਛੱਡ ਦੋ ਜੇ ਛੱਡ ਦੋਗੇ ਤੁਸੀਂ ਲੋਕ ਛੱਡ ਜੂਗਾ ਬੰਦ ਇਹ ਬੰਦ ਆ ਲੋ ਬਸ ਆਪੇ ਨਹੀਂ ਲੋ ਵਾਲੀ ਗੱਲ ਕਰੂ ਆਪਾਂ ਦੀ ਕਰਨ ਵਾਲੀ ਗੱਲ ਹੋ ਆਪ ਇਹ ਆਪਣੇ ਘਰ ਕੇ ਘੱਟ ਗੱਲ ਨੂੰ ਆਪ ਇਹਨੂੰ ਪਰਦਾਵਲ ਨੂੰ ਆਜੀ ਇਸ ਕਰਕੇ ਸਾਰੀਆਂ ਕੋਲਾਂ ਨੂੰ ਮਤ ਦੇ ਰਹੀ ਹੈ ਸਾਰੀਆਂ ਬੱਤਾਂ ਨੂੰ ਮਤ ਦੇ ਰਹੀ ਹੈ ਗੁਰਮਤ ਸਾਰੀਆਂ ਕੋਲਾਂ ਨੂੰ ਸੁਧਾਰ ਕਰ ਰਹੀ ਹੈ ਗੁਰਮਤ ਸੁਧਾਰ ਨੂੰ ਲੈਵਾਰ ਹੈ ਸੁਧਾਰ ਸੁਧਾਰ ਨੂੰ ਆਧਾਰ ਹੈ ਕੋਲਾਂ ਜਿਹੜਾ ਸੁਧਰ ਵੀ ਵਾਜਾਦਾਰ ਹੋ ਗਿਆ ਜਿਹੜਾ ਨਹੀਂ ਸੁਧਰ ਵਾਜਾਦਾਰ ਹੁੰਦਾ ਸਾਧਕੇ ਸੰਗੀ ਸਭ ਕੋ ਨੂੰ ਉਧਾਰਾ ਹੈ ਸਾਧ ਸੰਗੀ ਸਾਜਨ ਊਮੀਦ ਕੁਟੰਬ ਵਿਸਤਾਰਕ ਸਾਧ ਸਾਧ ਸੰਗੀ ਹਾਂ ਸਾਜਨ ਊਮੀਦ ਕੁਟੰਬ ਵਿਸਤਾਰ ਇਹਦਾ ਮਤਲਬ ਆਪਣਾ ਸਧਿਆ ਹੋਇਆ ਹੈ ਜਿਹੜਾ ਸਾਧ ਸੰਗੀ ਹੈ ਜਿਹਨੇ ਆਪਣਾ ਮਨ ਸਾਧਕੇ ਨਾਲ ਰੱਖਿਆ ਹੋਇਆ ਹੈ ਮੈਂ ਕਹਾਂਗਾ ਆਪਣਾ ਜਿਹਨੇ ਆਪਣਾ ਸਾਧ ਦਾ ਕੋਈ ਸਾਧ ਕੇ ਆਪਣੇ ਨਾਲ ਰੱਖਿਆ ਆਪਣੇ ਕਾਬੂ ਚ ਉਹ ਸਾਧ ਹੈ ਜਿੱਦਾ ਮਨਵਾਸ ਵਿੱਚ ਆ ਸਾ ਸੁਭੀ ਜਿਹਨੇ ਆਪਣਾ ਮਨਵਾਸ ਕਰ ਲਿਆ ਉਸਾਸੰਗੀ ਉਹਨੇ ਜੀਦਾ ਵਸਤੋਂ ਦਾ ਮਨ ਆਜ਼ਾਦ ਬਣਾਉਣਾ ਅੱਧਾ ਦਾ ਬੈਲੈਂਸ ਆਜ਼ਾਦ ਆਦਾ ਕੀਆ ਉਹ ਅੱਧਾ ਦਾ ਬੈਲੈਂਸ ਆਜ਼ਾਦ ਆ ਬਣਾਉਣਾ ਦਾ ਸਾ ਦੇ ਰੂਪ ਜਦੋਂ ਮਨ ਸਾਧ ਰਿਹਾ ਉਹਨੇ ਤਾਂ ਆਪਣਾ ਸੱਚੀ ਯਾਨੀ ਨਾਲ ਲੇ ਸਾਜਰ ਬੀਤ ਕੋ ਤੁ ਤੁਤਬ ਇਸ ਤਰ੍ਹਾਂ ਇਸ ਤਰ੍ਹਾਂ ਸਾਰੇ ਹਮਦਰਦ ਜਿਹੜਾ ਉਹਦੇ ਨਾਲ ਉਹਦਾ ਸਾਜਣ ਹੋਊ ਉਹ ਜੱਗਾ ਸਮਝੂਗਾ ਉਹਦੀ ਗੱਲ ਗੱਲੂਗਾ ਉਹੀ ਕਰੂਗਾ ਤੇ ਕਹਿੰਦਾ ਮਤਲਬ ਇਹ ਸਾਰੀਆਂ ਕੁਲਾਂ ਦਾ ਨਹੀਂ ਸਕਦਾ ਇਹ ਕੋਈ ਪਹਿਲੀ ਗੱਲ ਕਹੀ ਆ ਉਹਦੇ ਨਾਲ ਆ ਸ਼ਰਤ ਜੋੜੀ ਹੋਈ ਆ ਜਿਹੜੇ ਉਹਨਾਂ ਕੋਲਾਂ ਜੋ ਗੱਲ ਸੁਣ ਕੇ ਇਹ ਸਾਜਣ ਹੋ ਜਾਣ ਕਿ अपने ਭਈ ਭਾਈਏ ਆਪਣੀ ਫਾਇਦੇ ਦੀ ਗੱਲ ਕਹਿ ਰਹੇ ਆ ਉਹ ਧਰ ਜਾਣਗੇ ਜਿਹੜੇ ਕਹਿਣਗੇ ਆਪਣਾ ਵਿਰੋਧ ਗੱਲ ਲਿਆ ਉਹ ਵਿਰੋਧ ਖੜੇ ਹੋ ਜਾਣਗੇ ਉਹਦੀ ਤਰ੍ਹਾਂ ਜਿਹੜੇ कर ਇਸ ਮੱਧੇ ਸ਼੍ਰੀਖ ਹੋ ਜਾਣਗੇ ਸੁਣ ਕੇ ਵਿਰੋਧ ਕਰਨਾਂ ਨਹੀਂ ਜਾਣਗੇ ਪਹਿਲਾਂ ਉਹਨਾਂ ਦੀ ਮਤ ਹੋਰ ਹੈ ਉਹ ਨਹੀਂ ਕਰਨੇ ਜਿਹੜੇ ਗੁਰਮੱਤ ਦੇ ਪ੍ਰਚਾਰ ਨੂੰ ਪ੍ਰਚਾਰਕ ਉਹਦੀ ਗੱਲ ਨਾਲ ਉਹਦੀ ਗੱਲ ਤੇ ਐ ਮਨਣਾ ਕਿ ਸਾਡੇ ਹਿਤਕਾਰੀ ਗੱਲ ਕਹਿੰਦਾ ਸੱਜਣ ਉਹ ਇਹ ਸਾਡੇ ਹਿੱਤ ਦੀ ਗੱਲ ਕਰੇ ਸਾਡੇ ਫਾਇਦੇ ਦੀ ਗੱਲ ਕਰੇ ਵੀ ਭਾਈ ਸਾਡੇ ਫਾਇਦੇ ਦੀ ਗੱਲ ਕਰਦਾ ਹੈ ਉਹ ਸੱਜਣ ਹੁੰਦਾ ਬੀਤ ਵੀ ਹੋਈ ਹੁੰਦਾ ਕੁਟਬੀ ਵੀ ਹੋਈ ਹੁੰਦਾ ਘਰ ਦਾ ਆਪਣਾ ਫਾਇਦੇ ਦੀ ਉਹ ਗੱਲ ਕਰੂ ਉਹ ਹੀ ਸੱਜਣ ਬੀਤ ਆ ਉਹ ਹੀ ਆ ਆਪਣਾ ਫਾਦਾ ਬੀਤ ਸਾਰਿਆਂ ਨੂੰ ਜਿਹੜੇ ਇਹ ਦੈਰੇ ਜਾ ਜਾਣਗੇ ਬਤਾਉਣੇ ਉਹ ਤਾਂ ਨੰਮ ਕੇ ਸਿਰਫ ਦੂਏ ਨੂੰ ਦੱਬੇ ਜਿਹੜੇ ਸਾਜਣਤਾ ਤੋਂ ਪਰੇ ਵੱਜਲੇ ਜਾਣਗੇ ਸੱਜਣ ਨਹੀਂ ਬਲਤੇ ਸਭ ਤੇ ਸੱਜਣ ਬਲਣਾ ਪੈਣੀ ਜਫਰ ਤੋਂ ਅਖਣੀ ਪੈਣੀ ਮਤ ਜਾਇ ਕੋਈ ਹੋਵੇ ਸਾਰਿਆਂ ਦੇ ਕੋਲ ਲੱਗੂਗਾ ਜਿਹੜੇ ਇਹ ਸ਼ਰਤ ਮੰਨ ਲਾਂਗੇ ਇਹ ਸਾਜਣ ਬੀਤ ਕੁਟੱਬੀ ਬਣ ਜਾਣਗੇ ਇਸ ਮਤ ਦੇ ਢਾਣੇ ਬਣ ਜਾਣਗੇ ਸਿਰਫ ਉਹ ਤਾਲੂ ਜਿਹੜੇ ਲੋਕ ਤਰੇ ਨੇ ਉਹਨਾਂ ਨੂੰ ਇਸਲਾਮ ਵਾਲਿਆਂ ਨੇ ਤਿਆਰਤਾ ਆਪਣੇ ਤੋਂ ਇਸਲਾਮ ਤੋਂ ਪਿਆਬਲੇ ਰੂਸਲਾਮ ਵਾਲੇ ਕਹਿੰਦੇ ਨੇ ਕਿ ਸਾਡੇ ਪਾਸ ਤੇ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਵਾਸਤੇ ਹੋਣੀ ਵੀ ਨਹੀਂ ਗਈ ਜੇ ਇਸਲਾਮ ਹੋਣਾ ਹੈ ਇਸਲਾਮ ਨੇ ਹੁਣ ਤਿਆਰਤਾ ਇਹ ਵੀ ਫਰੀਦ ਦੀ ਗੱਲ ਹੈ ਇਹ ਮੋਟੂਣੇ ਸ਼ਾਦੀ ਗੱਲ ਹੈ ਇਹ ਮੋਟੂਣੇ ਸ਼ਾਦੀ ਗੱਲ ਹੈ ਐਵੇਂ ਹੀ ਸਾਡੇ ਜਿਹੜੇ ਜਿਹੜੇ ਭਗਤ ਹੋਏ ਨੇ ਪਿੱਛੇ ਉਹ ਇਹਨਾਂ ਨੂੰ ਸੀ ਉਹ ਯਾਤਰਾ ਕਰ ਗਿਆ ਉਹ ਉਹਨਾਂ ਦੇ ਖਿਲਾਫ ਨੇ ਉਹ ਤੇ ਖਿਲਾਫ ਨੇ ਉਸ ਵਿਚਾਰਧਾਰਾ ਤੇ ਖਿਲਾਫ ਹੋ ਲੈਣੇ ਪਏ ਉਹ ਭਗਤ ਇਹ ਹੋ ਗਿਆ ਇਹ ਕੋਈ ਆਇਆ ਭਗਤ ਵੀ ਮਹਾਪੁਰਸ਼ ਸੀ ਠੀਕ ਐ ਸੀ ਪਰ ਸਾਡੇ ਵਾਲਾ ਵੀ ਕੰਮ ਠੀਕ ਹੈ ਚਾਹੇ ਭਗਤ ਵਿਰੋਧੇ ਕਰਦੇ ਕਿ ਇਹ ਕੰਮ ਕਮੇ ਠੀਕ ਹੈ ਗੋਰੀ ਵੀ ਠੀਕ ਹੈ ਕਰਨਾ ਵੀ ਠੀਕ ਹੈ ਪੁਲਿਸ ਵੀ ਠੀਕ ਹੈ ਥਾਣੇ ਵੀ ਠੀਕ ਨੇ ਅਦਾਲਤਾਂ ਵੀ ਠੀਕ ਨੇ ਸਰਹਦਾਂ ਵੀ ਠੀਕ ਹੋ ਗਾਲਾਂ ਚੋਰੀ ਕਰਨਾ ਫਿਰ ਤੇ ਮੈਂ ਠੀਕ ਹ ਜਤੂ ਜਿਹੜੂ ਬਾਦਮੰਦ ਤੇ ਹੋ ਉਹ ਜਿਹੜੂ ਬੁਰਾ ਸਮਝੇ ਠੀਕ ਦੂਜੇ ਦਾ ਕਰਨਾ ਕਬੀ ਠੀਕ ਜੇ ਲੋਭ ਨੂੰ ਬੁਰਾ ਮੰਨਦੇ ਹੋ ਲੋਭ ਨੂੰ ਉਦਾ ਰਖਣਾ ਕਿਵੇਂ ਠੀਕ ਹੈ ਜੇ ਉਹਨੂੰ ਬੁਰਾ ਕਹਿਣਾ ਤੇ ਮੋਗ ਰਸਤਰਾ ਕਿਵੇਂ ਠੀਕ ਹੈ بس فقطا اسی رکھو فقط فرجیں دے لوگ فرجے دے ارتھ جڑے ہوئے اے کہنا پیا چل ہندو ساجد کہتا سی اوتا میں اورا دا کرم ہے او جی انا لوندا جی دا کرم ہووے تو کر ماضی دا دور دا وی واسطہ نہ ہوئے او ہندو کہ اے او دے مسلمان دے انہاں دا نور اچھا اے ہن انہاں دا دور دور دا واسطہ جی کرم نہ ਬਿੜੀ ਕੋ ਪੂਰ ਜਲ ਨਾਲੇ ਅੱਖਾਂ ਵਿੱਚ ਲੀਆਂ ਨਰਾਕਾਰ ਤੋਂ ਬਿਲਕੁਲ ਅੱਖਾਂ ਹੀ ਵੀ ਚਲੀਓ ਆਦਮੀ ਨੂੰ ਪਰਮੇਸ਼ਰ ਬਣਾ ਲਿਆ ਉਹ ਇਹਨਾਂ ਦਾ ਬਿਲਕੁਲ ਧਰਮ ਨੂੰ ਕੋ ਬਾਸਰ ਗਿਆ ਆਦਮੀ ਦਾ ਰਾਜਾ ਲੋਭ ਕਰਕੇ ਉਹ ਕਹਿੰਦਾ ਮੇਰੇ ਭਾਈ ਸਾਡੇ ਵਾਸਤੇ ਹੀਰਾ ਲੈ ਚੱਲ ਛੱਡ ਉਹ ਖੁਸ਼ ਹੋ ਜਾਊਗਾ ਰੱਬ ਤੇ ਅਦਵਾ ਜੋ ਰੱਬ ਕਹਿੰਦਾ ਪੰਦੀ ਨਾ ਰੱਬ ਕਹਿੰਦਾ ਕਹਿਣਾ ਨਾ ਰਾਜਾ ਤਾਂ ਬਈ ਦਵਾ ਹੋ ਇਹ ਜਿਹੜਾ ਦੁਆਲੇ ਨਾ ਸਵਾਰਥ ਇੱਥੇ ਤੱਕ ਠਿਰ ਗਿਆ ਧਰਮ ਤੋਂ ਬੰਦੋ ਪੁਰਾਣੇ ਫਿਰੋਣਾਂ ਨੂੰ ਦੂਰ ਅਸਲ ਗੱਲ ਬੜਾ ਕਹਿਣ ਤੋਂ ਸਵਾਰਥ ਹੀ ਚੂਰ ਹੈ ਕਿ ਤੁਹ ਕੋ ਧਰਮ ਨਹੀਂ ਹੈ ਕਰਤਾ ਆ ਰਿਹਾ ਬੱਜੇ ਕਰਪੂ ਇਹ ਸੁਣਾਉਂਦਾ ਧਰਮ ਕਿ ਤੁਸ ਤਰ ਕੋਈ ਨਹੀਂ ਹੈ ਤੁਸ ਐਸੇ ਸੱਚੀ ਰਾਤਰੀ ਵਾਲਾ ਲੱਗਦਾ ਜਦੂ ਕਹਣਾ ਆਪਣੇ ਆਪ ਨੂੰ ਰਾਤਰੀ ਹੋ ਜਾਦਾ ਇਹ ਕਰਕੇ ਸਿੱਖਾ ਨੂੰ ਗੁਰੂਆਂ ਨੇ ਪੱਕਾ ਦਿਖਾਇਆ ਨਹੀਂ ਜਿਸ ਨੂੰ ਨੇ ਕਹਾ ਕਿ ਤੂੰ ਵਾਹ ਮਹਾਂਦੀ ਭਾਸ਼ਾ ਦਾ ਲੋਹਾ ਜਰਵੀ ਦਾ ਮਰੂਖੀ ਚਰਵਾਦਾ ਹਾਂ ਹਾਂ ਮਰੂਖੀ ਜਾਨ ਨੂੰ ਸਹਿਦ ਮਾਨੂੰ ਮਜ਼ੀਦਾ ਬੰਦੇ ਨੂੰ ਤੋੜ ਮਤ ਚੱਲਣਾ ਉਹ ਜਿਹੜੇ ਕਿ ਇਹ ਬੇਦਾਚਾਰੀਆਂ ਦਾ ਦੇਸ਼ ਹੈ ਬੇਦਾਚਾਰੀਆਂ ਬੇਦਾਚਾਰੀਆਂ ਸਰੋਂ ਲੋង ਵੀ ਅਚਾਰੀਆਂ ਬੇਦਾਚਾਰੀਆਂ ਲੋਕ ਸਾਰੇ ਜੀ ਬੇਦਾ ਦੇ ਉੱਤੇ ਅਨੁਸਾਰ ਆਚਰਨ ਸੀ ਉਹ ਬੇਦਾ ਆਚਰਨ ਬੇਦਾ ਦਾ ਹੋਵੇ ਨਾ ਬੇਦਾ ਨੇ ਮੰਤਰ ਜਾਣਦੇ ਹੋ ਅਰਥ ਵੀ ਚੱਲਣਾ ਆਚਰਨ ਹੋਵੇ ਆਚਾਰਨ ਵਾਲਾ ਬੇਦਾ ਬੇਦਾ ਸਾਧੂ ਕੇ ਸੰਗਿ ਸੋਤਨ ਭਾਵੈ ਜਿਸ ਤਰ ਤੇ ਸਭ ਕੋ ਵਰਸਾਵੈ ਸਾਧੂ ਕਾ ਸੋਤਨ ਭਾਵੈ ਹੇ है। ਮਨ ਹੈ है 부ਤੀ ਹੈ 부ਤੀ ਕਾਲੂ ਸਾਧੂ ਦਾ ਸੰਨਾਨਾ ਵਾਲਾ ਸਾਧੂ ਤਾਂ ਹੈ ਜਿਹਦਾ ਵਰਸਾਤਾ ਸਾਧੂ ਹੈ ਇੱਕ ਸਾਧ ਆਏ ਦੂਆ ਸਾਧੂ ਹੈ ਬੜਾ ਉਹ ਸਾਧੂ ਹੋ ਗਿਆ ਜਿਹੜਾ ਮਨ ਸੇ ਉਹ ਸਾਧੂ ਆ ਜਿਹੜਾ ਸੱਦੇ ਉਹ ਸਾਧਾ ਇਹਨਾਂ ਹੋਰ ਕੰਮ ਕੋਲ ਪਹਿਲਾਂ ਉਹ ਸਾਸ ਸੀ ਪਹਿਲਾਂ ਉਹ ਸਾਸ ਸੀ ਛੱਡੀ ਉਹਦੀ ਬੰਦੀ ਆ ਸਾਧ ਇਹ ਇਹ ਜਦ ਮਾਲਾ ਤਸ ਵੀ ਸਾਧਾ ਉਹਨੇ ਵੀ ਹੌਂ ਛੱਡੀ ਆ ਨਾ ਪਹਿਲਾਂ ਉਹ ਵੀ ਹੌਂ ਸੀ ਉਹ ਵੀ ਜੀਵੀ ਨੇ ਥੋੜੀ ਜਿਹੀ ਬਣਾ ਜਦ ਉਹਨੇ ਹੌਂ ਛੱਡਤੀ ਉਹ ਸਾਧੂ ਹੋ ਗਿਆ ਇਹਨੇ ਮਾਇਆ ਛੱਡਤੀ ਸਾਧੂ ਹੋ ਗਿਆ ਮਾਇਆ ਤਾਂ ਹੈ ਨਹੀਂ ਸੀ ਆਉਂਦੇ ਜਿਹੜੇ ਹੋਂਦੀ ਇਹਨੇ ਮੈਂ ਛੜਤੀ ਉਹਨੇ ਹੋਂਦ ਛੜਤੀ ਹੋਂਦ ਇਹ ਜਿਹੜੀ ਹੋਂਦੀ ਜਿਓ ਜਮਾਇ ਨਹੀਂ ਜਿਹੜੀ ਜੀ ਸੀ ਕੋਈ ਨਾ ਕੋਈ ਖਾਦਾ ਸੀ ਕੋਈ ਕੋਈ ਖਾਦਾ ਸੀ ਹਾਂ ਹਾਂ ਉਹ ਤੁਹਾਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਧਾਨੜ ਸਾਰਿਆਂ ਉੱਤੇ بارش ਕਰਦਾ ਉਹ ਇਹ ਸਰਦਾ ਸਾਰੀਆਂ ਮਤਾਂ ਦੁਨੀਆਂ ਜਾਨੂ ਸਭ ਕੋ ਭਰੋਸਾ ਵੈ ਭਰੋਸਾ ਵੈ ਸਾਰਿਆਂ ਦੇ ਉੱਤੇ ਸਾਰਿਆਂ ਨੂੰ ਪ੍ਰੇਸ਼ ਕਰਦਾ ਹੈ ਸਾਰਿਆਂ ਤੇ ਵਰਸਦਾ ਹੈ ਮੱਘਾ ਹੋ ਕੇ ਵੱਡੇ ਵੱਡੇ ਪਹਾੜਾਂ ਪਰਬਤਾਂ ਦੇ ਜਾ ਕੇ ਵਰਸਦਾ ਜਿੰਨੇ ਰਸਤੇ ਨੇ ਵੱਡੇ ਤੋਂ ਵੱਡੇ ਉਹਨਾਂ ਦੇ ਉੱਤੇ ਪਹਾੜਾਂ ਦੇ ਉੱਤੇ ਜਿਹੜੇ ਰਸਤੇ ਜਿੱਤੀ ਵੱਜੀ ਉੱਚੀ ਪੱਤਾਂ ਵਾਲਾ ਉਹਦੇ ਸਭ ਦੇ ਉੱਪਰ ਜਾ ਕੇ ਵਰਸਦਾ ਇਦੋਂ ਉੱਪਰ ਕੋਈ ਨਹੀਂ ਬਸਰਦਾ ਜੋ ਗੁਰਬਾਣੀ ਦੀ ਵਾਰਿਸ ਹੈ ਜੋ ਪਾਕਿਸਤਾਨ ਹੈ ਵਾਰਿਸ ਕੀਤੀ ਹੈ ਉਹ ਗੱਲ ਅਲੱਗ ਹੈ ਅਸੀਂ ਉਹਦੇ ਪੂਰੇ ਅਸਨਾ ਕਰ ਸਕੀਏ ਉਹ ਸਾਡੀ ਤਾਂ ਗੱਲ ਥੋੜੀ ਕਹੀ ਹੋਈ ਹੈ ਇਹਨਾਂ ਕਹੀ ਹੈ ਕਿ ਸਭ ਨੂੰ ਦੁਨਿਆ ਦੇ ਮੰਦੀ ਹੋਈ ਹੈ ਦੁਨਿਆ ਮੰਦੀ ਦੇ ਇਹ ਤਾਂ ਉੱਚਾ ਕੁਛ ਨਹੀਂ ਹੋ ਉੱਪਰ ਗਿਆਨ ਤਾਂ ਕੁਛ ਇਹ ਗਿਆਨ ਜਦ ਤੱਕ ਆਤਮਾ ਦਾ ਸਵਾਲ ਹੈ है, ਐਂਡ ਫਾਈਨਲ ਹੈ ਇਦੇ ਚ ਹੋਰ ਤਰੱਕੀ ਨਹੀਂ ਹੋ ਸਕਦੀ ਬਾਕੀ ਗਿਆਨ ਸਾਰਿਆਂ ਦੇ ਇਦੇ ਚ ਹੋਰ ਖੋਜ ਨਹੀਂ ਹੋ ਸਕਦੀ ਅੰਤ ਤੱਕ ਦੀ ਖੋਜ ਹੈ ਦੁਨੀਆ ਦਾ ਕੋਈ ਗਿਆਨ ਅੰਤ ਤੱਕ ਦਿਖਾਉਂਗਾ ਸਭ ਗਿਆਨ ਨੂੰ ਧੂੜ ਹੈ ਬਾਕੀ बाकी तो माया दे जान ने सारे सब की खोज चालू है एक ज्ञान ना जड़ा है आ ज्ञान गया आत्मा बारे ये भी फुल और फाइनल होय होय वो भेद बिच है वो जड़े सुब्रत शास्त्र करले दुवे अर्थ कर ओ जण जा पापा ले उन सुन समझ थोड़ी सी ਉੱਠੜ ਜਾ ਕੁਝ ਜਾਣ ਕੇ ਪਾਇਆ ਕੁਝ ਪਾਇ ਗਿਆ ਕੋਤੜ ਮੜਿਆ ਤਿਲਕ ਮੇਂ ਜਾ ਕੋਟੇ ਲੰਭ ਜਾਉਂਦਾ ਸੀ ਜੇ ਕੋਈ ਠਿਗਣੀ ਚਾਹਦਾ ਹੋਵੇ ਔਰ ਥੋੜਾ ਤਿਲਕ ਵੀ ਜਾਵੇ ਕਿ ਤੋ ਵੇ ਤਾਂ ਜਿੱਥੇ ਤਿਲਕ ਨਾ ਹਈ ਹੋਇਆ ਸੁਲਪਰੀਏ ਦੇ ਵਿੱਚ ਚਾਂੜ ਕੇ ਇਹ ਲੈ ਗਿਆ ਦੂਰ ਤੱਕੜੀ ਸਤੇ ਵਿਦਵਾਨ ਉੱਠੜ ਨਾ ਗਿਆ ਸੀ ਬਾਹਨਾ ਸਲਗੜਨਾ ਬਣਾ ਲੈ ਡੇੜਾਂ ਦਾ ਬੇਜੰਦੇ ਸੀ ਸਭ ਕੁਲ ਵੇੜਨਾ ਚਾਹੁੰਦੇ ਸੀ ਫਿਰ ਉਹ ਮਾਸ਼ੱਲਾ ਤੋਣਾ ਚਾਹੁੰਦੇ ਸੀ ਲਿਫਟੇ ਕਰ ਤੋਂ ਸੀ ਅਚਨ ਚਲੇ ਪਰਮਾਨ ਚਾਰ ਪੰਜ ਹਾਣ ਬਣਾਤੀ ਜੋ ਫੜ ਕੇ ਆ ਕੇ ਚਾਹਦੇ ਸੀ ਨਾ ਕੋਈ ਥੋੜੀ ਅਥੇ ਗੱਲ ਸੀ ਸਲਿਪਰੀ ਸੀ ਵਜਾਇ ਸੀ ਸੀਗੀ ਸਾਡੇ ਭਾਸ਼ਾ ਦੀ ਉਹਦੇ ਲੈਵਰੇਜ ਦੇ ਸਾਧ ਸੰਗੀ ਧਰਮ ਰਾਏ ਕਰੇ ਸੇਵਾ ਸਾਧ ਸੰਗੀ ਧਰਮ ਰਾਏ ਕਰੇ ਸੇਵਾ ਜੇ ਸਾਧ ਸੁੱਕੀ ਆ ਜੇ ਮਾ ਧਰਮ ਰਾਏ ਉੱਤੇ ਸੇਵਾ ਕਰਦਾ ਆ ਕੇ ਧਰਮ ਰਾਏ ਉੱਤੇ ਸੇਵਾ ਕਰਦਾ ਆ ਕੇ ਧਰਮ ਰਾਏ ਕਹਿੰਦਾ ਵਾ ਜਿਹੜੇ ਤਾਂ ਗੁੱਟ ਕਰਿਆ ਅਨਿਆਸੀ ਬੇਗਰ ਨਾਲੇ ਅੱਛੇ ਆਦਮੀ ਜਿੱਥੇ ਤੱਕ ਕੋਨਾ ਨਹੀਂ ਵਸ ਚਲੇ ਉਹ ਝੂਠੀ ਬੋਲਦੇ ਪਾਪ ਦੀ ਕਰਦੇ ਕਿਸਦਾ ਹੱਕ ਨਹੀਂ ਖਾਂਦੇ ਜਨਾਬਾ ਦੇਵਤਾ ਕਹਿੰਦੇ ਨੇ ਸੱਚਾ ਸੁੱਚਾ ਉਹਦਾ ਉਹਦਾ ਜੁੱਥੇ ਸੇਵਾ ਕਰਦੇ ਜਨਮ ਅਕੀ ਉਹ ਤਾਂ ਸ਼ਬਦ ਵਿਚਾਰ ਕਰਦੇ ਨੇ ਆਪਣਾ ਮਨ ਮਨਉਂਦੇ ਨੇ ਧਰਮ ਰਾਏ ਕਰੇ ਸੇਵਾ ਉਹ ਧਰਮ ਰਾਏ ਤਾਂ ਪਹਿਲੀ ਸਟੇਜ ਦੇ ਵਿੱਚ ਹੀ ਆ ਸਰ ਵੀਰ ਜੀ ਕਹਿੰਦਾ ਕਹਿੰਦਾ ਹੀ ਆਪ ਹੀ ਆਦਮੀ ਚਲੋ ਧਰਮ ਰਾਏ ਕੋਈ ਕੇ ਬਾਹਰ ਨੇ ਕੀਤਾ ਅੰਤਰਾਤਮਾ ਨਾਲ ਜੁੜ ਕੇ ਹੀ ਹੋਇਆ ਸਰ ਐ ਉਹ ਉਹਦੇ ਚਿਹਰੇ ਆ ਉਹ ਹਰ ਤਰ੍ਹਾਂ ਦੇ ਉੱਪਰ ਸਰਬਦਾਇ ਨਾਲ ਵੱਖਰਾ ਕੀਤਾ ਉਹ ਬਨਾ ਹੋਇਆ ਕੋਣ ਬ੍ਰਹਮ ਵੀ ਇੱਤ ਹਰੇ ਹਾਂ ਹੂੰ ਹੂੰ ਜਿਹੜਾ ਹਰ ਕੁਝ ਕਰ ਸਕਦਾ ਕੋਣ ਬ੍ਰਹਮ ਦੇ ਰੂਪ ਚ ਕਰ ਸਕਦਾ ਕੋਣ ਬ੍ਰਹਮ ਦੀ ਇੱਛਾ ਇਤ ਬ੍ਰਹਮ ਹੂੰ ਹੂੰ ਬ੍ਰਹਮ ਹੁਕਮ ਆਗਤ ਆਗਮਨ ਕਰ ਸਕਦਾ ਉਹ ਕਰੂਗਾ ਹੁਕਮ ਨਾਲ ਆਪਣੀ ਇੱਛਾ ਨਾਲ ਇਹ ਕਰਕੇ ਉਹ ਥੇ ਜਾ ਕੇ ਦਹਾਂ ਇਹਦੇ ਨਾਲ ਵੀ ਜੁੜ ਜਾਂਦੀ ਹੈ ਇਹਦਾ ਤਾਂ ਹਰਮਨ ਆਇਆ ਨੂੰ ਨੇ ਜੈਦੂ ਅਡੋਡਾ। ਇਹਨੂੰ ਅਡਕਾ ਜੇ ਧੀਰੋ ਕਰਮ ਇਹਨੂੰ ਆਪਾ। ਦੋ ਰੜਕੇ। ਮਨ ਵੱਖਰਾ ਕਰ ਇਹਨੂੰ। ਮਨ ਵੱਖਰਾ ਕਰਿਆ ਬਣਾ ਨਹੀਂ ਇੱਥੇ ਨੂੰ ਨਹੀਂ ਮਰ ਕੋਈ ਕਹਿ ਸਕਦਾ। ਮਨ ਵੱਖਰਾ ਕਰ। ਫੇਰ ਨੂੰ ਕੋਟਾ ਉਹਨੂੰ ਧਰਮ ਦਾ ਕਹਿ ਸਕਦਾ। ਕਰਮ ਨੂੰ ਕੋਟਾ ਰੱਖ ਮੈਂ ਹਾਂ ਤਾਂ ਅਸਲ ਖਰ ਉਹ। ਅਨੂ ਉਹੜ ਕੇ ਖੋੜ ਅੱਡ ਕੱਢ ਕੇ ਤਾਂ ਗਿਆ ਖੋਟ ਹੈ ਜੀ ਉਹ ਹਰਨੇ ਵਕਤ ਹੀ ਤਰ ਸਰਵਣ ਕੋ ਤੂੰ ਬਖ ਹੋ ਜਾ ਸੱਚੇ ਉਹ ਅੱਡ ਫੜ ਲੈ ਕੋਲਸ ਨੇ ਗੱਦਨ ਕੋ ਠੀਕ ਹੈ ਮੈ ਤੁਹਾਨੂੰ ਨਹੀਂ ਪਤਾ ਸਾਧੂ ਪਤਾ ਅਸਵਾਦੀ ਹੈ ਤੁਹਾਨੂੰ ਨੂੰ ਪਤਾ ਕਿਹਦਾ ਵਾਸਤਾ ਹੈ ਧੋੜੂਣੀ ਬੋਸੇ ਨੇ ਦੋਨੋਂ ਤਾਂ ਆਏ ਨਹੀਂ ਉਹ ਕਹਿੰਦੇ ਦੋਨੋਂ ਨਹੀਂ ਬਿਤਾ। ਥੋੜਾ ਕੋਈ ਖਸੂਰ ਨਹੀਂ। ਜੇ ਉਹ ਕਹਿ ਦੇਣਾ ਘਰ ਦੇ ਵੀ ਇਹ ਮੰਦੇ ਸੀ ਤਾਂ ਬੇਹੜਾ ਰੋੜ ਚੱਲਦੇ ਆ। ਤਾਂ ਵੀ ਉਹ ਵਰੀ। ਹਾਂ ਹਾਂ ਸਤਗੁਰਦੇਵ। ਗੁਰਦੇਵ ਨੂੰ ਸਾਧਕੇ ਤਾਂ ਆਹ ਸਾਧੂ ਹੈ। ਸਾਧੂ ਦਾ ਸਾਧੂ ਹੈ। ਇੱਥੇ ਤਾਂ ਸੇਵਾ ਕਰਨੀ ਹੈ ਤਾਂ ਉਹ ਪਹਿਲੀ ਸਟੇਜ ਆ ਲੈ ਜੋ ਉਹ ਜਿਹਨਾਂ ਪਾਸ ਤਰ੍ਹਾਂ ਤੋਂ ਕਹਿੰਨੇ ਜਿਹਨੂੰ ਗੁਰਦੇਵ ਕਹਿੰਨਾ ਗੁਰਦੇ ਮਾਤਾ ਗੁਰਦੇ ਪਿਤਾ ਉਹ ਹੈ ਤਰ ਮਹਾਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਦਲਾਲੀ ਇਦਾਂ ਦੀ ਗੱਲ ਸੁਣ ਕੇ ਮਾਨੂੰ ਉਦਿਨ ਜਾਤਾਂ ਦਾ ਉਦਿਨ ਸੁਣ ਕੇ ਉਦਿਨ ਜਾਤਾਂ ਦਾ ਜੇ ਜੀ ਮੰਨਦੇ ਹਾਂ ਉਹਦੇ ਵਾਸਤੇ ਹੁਕਮ ਹੈ ਬਹਿ ਕੇ ਸੱਚਾ ਭਜਾਰ ਸੱਚਾ ਜੋ ਤਰਫੋਂ ਲਈ ਵਿਚਾਰ ਕਰ। ਫਿਰ ਉਹ ਸੱਚਾ ਵਿਚਾਰ ਕਰਕੇ ਵੀ ਮਤ ਨੂੰ ਉਦੀ ਤੁਮੰਤੇ ਗੱਲ ਪਾਉਂਦੇ ਨੇ ਵੀ ਇਹਨੂੰ ਬਣਾ ਦੋ। ਐ ਘਰ ਹੁੰਦਾ ਮਨ। ਆ ਥੋੜੀ ਗੱਲ ਹੁੰਦਾ। ਇਹ ਇਦਾਂ ਹੀ ਚੱਲ ਨਹੀਂ ਪੜਾਂ। ਉਹ ਇਥੇ ਜਿਆਦਾ ਪੈਂਦਾ ਕਿ ਪਰ ਨੂੰ ਉਹ ਗੱਲਾਂ ਮਸਲਵਾ ਜਿਹੜੀਆਂ ਨੇ ਵਾਲੀਆਂ ਉਤੋਂ ਹਟਾਉਣ ਦੀ ਕੀ ਆਪਾ ਮੰਨੇ ਕੇ ਗਲੇ ਆ ਠੀਕ ਆ ਨਾ ਹਾਂਜੀ ਸਾਧ ਜੀ ਕੇ ਗਲੇ ਆ ਸਾਧ ਜੀ ਕੋਈ ਧਰਮ ਰਾਏ ਕਰੇ ਸੇਵਾ ਸਾਧ ਸਾਧ ਸਗੇ ਈ ਧਰਮ ਰਾਏ ਕਰੇ ਸੇਵਾ ਧਰਮ ਰਾਏ ਕਰੇ ਤਾਂ ਛੋਟਾ ਹੁੰਦਾ ਹੈ ਕਹਿੰਦਾ ਮਤਲਬ ਹੈ ਹਰ ਕੀ ਹੈ ਹਰ ਵੱਡਾ ਤਾਂ ਅੰਦਰੋਂ ਛੋਟਾ ਹਾਂ ਛਾਰਮ ਰਾਏ ਤਾਂ ਛੋਟਾ ਹੀ ਆ ਇਹ ਅਨੇ ਧਰਮ ਰਾਏ ਬਹਾਦ ਬਣਾਇਆ ਹਾ ਜੋਥੇ ਜਾਣਾ ਉੱਥੇ ਹਜ਼ਾਫਤਾ ਹੋਣਾ ਉੱਥੇ ਹੋਣਾ ਉੱਥੇ ਹੋਣਾ ਪਰ ਰਿਦਮ ਨਹੀਂਵੇਂ ਉਹ ਕਹਿੰਦੇ ਵੀ ਜਿਹੜਾ ਤੁਹਾਡਾ ਧਰਮ ਦਾ ਇਹਦਾ ਸਾਥ ਜਿਹੜਾ ਹੈ ਸਾਧੂ ਆ ਆ ਸੇਵਾ ਕਰਦਾ ਮਤਲਬ ਆ ਉਪਦੇਸ਼ ਕਰਦਾ ਸਾਰੀ ਜਿਹੜਾ ਸੱਚਾ ਮਾਰਗ ਜਾਣਦਾ ਹੈ ਸੱਚੇ ਮਾਰਗ ਤੇ ਚੱਲਦਾ ਉੱਥੇ ਦਾ ਧਰਮ ਦਾ ਸੇਵਾ ਕਰਦਾ ਹੁੰਦਾ ਉਹ ਸਾਰੇ ਧਰਮ ਰਾਏ ਜਿਹੜੇ ਗੁਰੂ ਘਰ ਚ ਆ ਕੇ ਸੇਵਾ ਕਰਦੇ ਸਾਧੂ ਸਵਾਦਾ ਸਵਾਦਾ ਦੀ ਧਰਮ ਹੈ ਇੰਦਾ ਹੋਰ ਕੀ ਇੰਦਾ ਉਹ ਧਰਮ ਹੈ ਕੋਈ ਬਹੁਤਾ بڑا ਨਹੀਂ ਉੱਡਾ ਹੈ ਮੈਂ ਪੜਾਇਆ ਹੋਇਆ ਧਰਮੀ ਆਦਮੀ ਥੋੜਾ ਧਰਮੀ ਆਦਮੀ ਦੇਵਤਾ ਦੇਵਤਾ ਆਦਮੀ ਨੂੰ ਕਹਿੰਦੇ ਉਹ ਧਰਮ ਦਾ ਵਰਗਾ ਹੀ ਸੁਭਾਅ ਵਰਤਦਾ ਜਦੋਂ ਇਹਨਾਂ ਵਰਤਾਰਾ ਕਰਦਾ ਉਹ ਧਰਮ ਦਾ ਵਰਤਾਰਾ ਕਰਦਾ ਦੁਨੀਆ ਉਹ ਧਰਮ ਹੈ ਸੋਚੋ ਬਤਾਓ ਸੱਚਾ ਸੁੱਚਾ ਬਰਸਾਣਾ ਸੰਗੀਤ ਅਰਮ ਰਹੇ ਕਰੇ ਸੇਵਾ ਸਾਧ ਕੇ ਸੰਗੀ ਸੋਭਾ ਸੁਰ ਦੇਵਾਂ ਸਾਧ ਕੇ ਸੁਖੀ ਜਿਹੜਾ ਮੰਨ ਲਿਆ ਹੋਇਆ ਸੋਭਾ ਸੁਰ ਦੇਵਾਂ ਸੋਭਾ ਇਹ ਨਾਲ ਵਿੱਚ ਰਾਜ ਜਨ ਪਾਲੇ ਖਾਬੀ ਨਾ ਹੋਵੇ ਸੁਰ اور ਦੇਵਤਿਆਂ ਦੇ ਉਹਦੀ ਸੋਭਾ ਜਿਹਨੇ ਸਭ ਮੰਨ ਖਾ ਲਿਆ ਇਹਨਾਂ ਸੁਰ ਕੌਣ ਨੇ ਦੇਵਤੇ ਉਹ ਦੇਵਤੇ ਜਿਹਨਾਂ ਦੀ ਸੁਰ ਇੱਕਾ ਸਚਨਾ ਜੁੜੀ ਹੋਈ ਹੈ ਜਿਹੜੇ ਦੇਵਤੇ ਸਚਨਾ ਜੁੜੇ ਹੰਕਾਰੀ ਨਹੀਂ ਹੋ ਸੁਰ ਜਿਹੜੇ ਦੇਵਤੇ ਸੁਰ ਨਾਲ ਸੁਰ ਨਾਲ ਸੁਲਮ ਲਾਉਂਦੇ ਨੇ ਉਹ ਨਾ ਉਹਨਾਂ ਦੇਵਤਿਆਂ ਦੀ ਗੱਲ ਹੈ ਦੋਿਆਂ ਦੀ ਨਹੀਂ ਹੈ ਦੇਵਤਾਂ ਵੀ ਹੈਗੇ ਨੇ ਜਿਹੜੀ ਸੁਣ ਕੇ ਵਰਗੇ ਹੋ ਰੂਹ ਕਰੋੜ ਜਾਨ ਲੱਗਿਆ ਕਹਿੰਦੇ ਆ ਕਿ ਕਹਿੰਦੇ ਉਹ ਕਿਰੂਣ ਹੈ ਉਹ ਉਹਦੀ ਸੋਚ ਹੈਗੇ ਕਾਲੇ ਨੇ ਤੇ ਘੜੀਆ ਉਹਨਾਂ ਦੇ ਵੀ ਲਕਰੂੜ ਵੀ ਹੋਲੀ ਬਣਾਇਆ ਪਰ ਥੂੜ ਉਹਨਾਂ ਨੇ ਨਹੀਂ ਚੁੜਾਇਆ ਸਾਰਾ ਉਹ ਇੱਕ ਚੀਜ਼ ਬਣਾਈ ਹੀ ਜਾ ਬੁੱਤ ਇਹਦਾ ਜਿਹੜਾ ਸਾਧੂ ਦੇ ਸੰਗਤ ਕਰਦਾ ਰਹਿੰਦਾ ਉਹਦੇ ਅੰਦਰੋਂ ਪਾਪ ਆਪੇ ਹੀ ਚਲੇ ਜਾਂਦੇ ਚਲੋ ਛੱਡੋ ਯਾਰ ਉਹ ਵਾਂਗਰ ਵੀ ਆਪਣੀ ਪਛਤਾ ਹੈ ਫਿਰ ਕਦੋਂ ਅੱਗੇ ਜਾਉਂਗਾ ਸਾਧਕੇ ਜਲੇ ਜਾਉਂਗਾ ਜਿਹੜਾ ਪਾਪ ਹੈ ਅਸਲ ਕੇ ਪਾਪ ਜਿਹੜਾ ਉਗੜੇ ਜਦੋਂ ਆਪਾਂ ਹੁਕਮ ਦਾ ਵਿਰੋਧ ਕਰਦੇ ਆ ਆਪਣੀਆਂ ਇਛਾਵਾਂ ਨੇ ਜਿਹੜੀਆਂ ਉਹ ਪਾਪ ਨੇ ਜਿਹੜੀ ਇਹ ਛਾਂਗੌੜ ਤੇ ਉਹ ਪਾਪ ਨੇ ਉਹ ਛੱਡ ਜਾ ਪਾਪ ਲੈਣ ਕਰਦੇ ਹੁਕਮ ਦਾ ਵਿਰੋਧ ਹੀ ਕਰਦਾ ਹਾਂ ਹਾਂ ਜੀ ਸਾਥ ਸੰਗੀ ਗਏ ਸਾਥ ਸੰਗੀ ਅਵਰਤ ਕਰ ਉਹ ਪਰਤ ਗੁਰ ਕਰਦਾ ਐਸੀ ਗੱਲ ਕਰਦਾ ਐਸੇ ਗੁਰ ਨਾ ਜਿਹੜੇ ਸਦਾ ਰਹਿਣ ਵਾਲੇ ਗੁਣ ਨੇ ਪਰਮੈਸ਼ਰ ਦੇ ਉਹ ਗੁਣ ਹੁੰਦਾ ਇਹ ਸਦਾ ਰਹਿਣ ਵਾਲੇ ਸਦਾ ਗੁਣ ਰਹਿਣ ਵਾਲੇ ਇਹ ਉਹ ਗੁਣ ਕੁਛ ਚਾਹੇ ਜੇ ਵੀ ਗੁਣ ਨੇ ਕਿ ਸਦਾ ਦੀ ਰਹਿਣ ਵਾਲੇ ਉਹਦੇ ਸਮਰਤ ਗੁਣ ਗਏ ਨੇ ਇਹਦਾ ਮਾਰਨ ਵਾਲਾ ਕੋਣਾ ਸਭ ਗੁਣ ਵੀ ਆਉਂਦੇ ਉਹਦੀ ਉਹਦੀ ਵੰਗਲ ਨਹੀਂ ਲੋੜੀ ਉਹਦੀ ਮੁਝੂਰੀਆ ਸੰਗਤ ਜੋ ਪਹਿਲੇ ਹੀ ਪੈਦਾ ਕਰ ਲਵੇ ਤਾਂ ਫਿਰ ਖਲਾਰਾ ਜਿਹੜਾ ਪੈਦਾ ਹੁੰਦਾ ਉਹਦਾ ਸਿਸਟਮ ਸੈਕਟਰ ਨਾਲ ਨਹੀਂ ਜੇ ਆਕਸੀਜਨ ਪੈਦਾ ਕੀਤੀ ਹੈ ਤਾਂ ਆਕਸੀਜਨ ਖਤਮ ਵੀ ਹੋ ਰਹੀ ਹੈ ਉਹਾਰੇ ਇਹ ਖਾ ਕੇ ਖਤਮ ਹੋ ਰਹੀ ਹੈ ਕੋਈ ਪੈਦਾ ਵੀ ਕਰ ਰਿਹਾ ਇਹ ਉਹਦਾ ਸਿਸਟਮ ਹੋਊਗਾ ਜੇ جی وا جیتے بردا اتمان مال دی ہے مالی دی مجبوریت رکھ تو شاننا ہاں کئی بار شاننا فڑ زیادہ لگدا او جڑیاں تکلیفاں دکھاں ہیں او چھڈڑن گے ہاں زیادہ واسطے ہاں دو جندنی ٹاڑیاں روڑ دے وڑ دے کوئی ਸਾਰ ਦੇ ਸੰਜੀਵ ਸਰਵਥਨ ਹਰ ਜਗ੍ਹਾ ਲੋਕਾਂ ਜਾ ਸਕਦਾ ਤੂੰ ਉਹੀ ਹੈ ਸਰਵਥਨ ਗੰਮ ਆਹੋ ਉਹ ਧਿਆਨ ਕਰਕੇ ਹੀ ਜਾਣਾ ਸੁਰਤ ਕਰਕੇ ਹੋਰ ਗਾਂਵ ਹੋ ਜਾਣਾ ਧੀਰਜ ਕਰਕੇ ਥੋੜੀ ਜਾਣਾ ਚ ਗਿਆ ਆਪਣੇ ਉੱਤਨਾਂ ਲੋਕਾਂ ਦੇ ਪਰੇ ਵੀ ਜਾ ਸਕਦਾ ਮੈਂ ਤੇ ਨਾਮ ਜੀ ਨੂੰ ਜਾਂਦਾ ਕਿ ਜਿਹਨਾਂ ਨੇ ਵੀ ਜਾਂਦਾ ਤੇ ਲੋਕਾਂ ਦਾ ਲੈ ਕੇ ਆਹੋ ਇਦਾਂ ਬਰਾਬਰ ਜਾਂ ਤੇ ਨਾਲ ज्ञान के शंग। शंग। को बेर चूड़े हो साथ के संग ज्ञान राय नाल कॉन्फ्रेंस लायो ज्ञान राय के बना जोड़ा बना ना मर्जी बोल नानक जी ज्ञान के साथ के संग सब सफल जन्म ज्ञान के साथ संगत करने वास्ते बुद्धि कहनी मेरा भी जन्म सफल हो गया साथ में संग कोई आदमी करूंगा उसका जन्म सफल हो जाएगा ਸਦਕਤ ਕਰਨ ਨਾਲ ਹੁਣ ਬਾਹਰਲੇ ਦੀ ਗੱਲ ਹੈ ਬਾਹਰਲੇ ਦੀ ਗੱਲ ਕੋਈ ਹੋਰ ਸਬਕ ਜਿਹਨੇ ਸਦਿਆ ਹੋਇਆ ਬੰਦਾ ਮਨਣਾ ਹ ਜਿਹਨੇ ਸਹੀ ਸਦਿਆ ਹੋਇਆ ਸਦਿਆ ਹੋਏ ਮਨ ਵਾਲੇ ਨਾਲ ਨਾ ਸਦਿਆ ਹੋਇਆ ਬੰਨ ਵਾਲਾ ਵੀ ਜਦੋਂ ਸਫਲਾ ਕਰ ਲੈਂਦਾ ਬਰਕਤ ਖਾਏ ਸਭ ਕਰੋੜ ਉਹ ਗੱਲ ਹੈ ਮਿੱਤੇ ਸਬਰ ਜਦ ਮੌਕੇ ਮੈਂ ਜਨਮ ਤੋਂ ਪਹਿਲਾਂ ਸਫਲਾ ਹੋ ਚੁੱਕਿਆ ਸਭ ਦਾ ਉਦੋਂ ਹੀ ਜਨਮ ਪੈ ਜਾਂਦਾ ਜਦੋਂ ਹਰ ਕਦਮ ਉਹਦਾ ਲਿਖੇ ਲੱਗਦਾ ਹੈ ਜਦੋਂ ਸਫਲਾ ਹੁੰਦਾ ਕਿਵੇਂ ਸਵਾਲ ਕਿੰਨਾ ਸਫਲਾ ਹੋ ਗਿਆ ਕਿੰਨਾ ਰਹਿ ਗਿਆ ਸਫਰ ਜਨਮ ਕਿੰਨਾ ਹੋ ਗਿਆ ਜਿਨਾਲਾ ਤੁਰ ਗਿਆ ਜਿਨੇ ਉਹਨੇ ਚੇਦੂ ਜਿਨੇ ਘੰਟੇ ਜਿਨੇ ਉਹਦੇ ਟਾਈਮ ਲੱਗ ਗਿਆ ਉਹੀ ਤਾਂ ਨਾ ਇਹ ਘੜੀ ਘੜੀ ਕਰੀਆ ਇਸ ਤੋਂ ਸੰਜੀਤ ਗੋਸ਼ਟਾ ਜੋਗੀ ਨੂੰ ਸਲਾਹ ਬਲੋਰੀ ਨਜ਼ਰ ਆਉ। ਉਹ ਗੱਲ ਉਸ ਗੱਲ ਨੂੰ ਹੀ ਦੁਆਰਾ ਸਮਝ ਇਸ ਤਰੀਕੇ ਨਾਲ ਗਿਆ ਹੈ। ਸਫਲ ਜਨਮ ਕਿੰਨਾ ਜਨਮ ਸਫਲਾ ਹੋ ਗਿਆ ਉਹਦਾ। ਗੋਸ਼ਟੇ ਜਿਤਨਾ ਲਾਭ ਹੋ ਗਿਆ। ਉਹ ਜਨਮ ਦਾ ਸਫਲਾ ਹੋ। ਜਿਹਨਾਂ ਲਾਭ ਲੈ ਲਿਆ ਉਹ ਜਨਮ ਸਫਲਾ ਹੋ ਗਿਆ। ਜਿੱਦਾਂ ਦਾ ਤੇਲ ਡੁੱਲ ਗਿਆ ਉਹ ਤਾਂ ਗਿਆ ਜਿੱਦਾਂ ਨਹੀਂ ਮੈਂ ਜਾਲਿਆ ਰੋ ਇਸੀ ਗੱਲ ਹੀ ਹੋਰ ਸੁਭਰਾ ਹੋ ਗਿਆ ਜਦ ਤੇਲ ਡੁੱਲ ਗਿਆ ਲਜੀ ਕੜਾ 80 ਹਾਂ ਜਿਹੜਾ ਤੇਲ ਪੀਂਦੇ ਨੇ ਚੱਬ ਲੈ ਖਾ ਲਿਓ ਠੀਕ ਉਹ ਤਾਂ ਖਾ ਲਿਓ ਉਹ ਤਾਂ ਬਿੱਜ ਨਹੀਂ ਲਖਾ ਲਿਆ ਉਹ ਤਾਂ ਫਿਰ ਸਾਦਾ ਪੀਤਾ ਲਾਇਆ। ਓਹੀ ਨੇ ਕੇ ਸੰਗੀ ਨਹੀਂ ਕੁਸਤਾਲ। ਜਿਹੜਾ ਸ਼ਬਦ ਵਿਚਾਰ ਆ ਨਾ। ਉਸ ਵੇਲੇ ਜਿਹੜਾ ਕਹਿੰਦਾ ਅਸੀਂ ਖਾ ਲਿਆ। ਓਹੀ ਨੇ ਵੇਸਾ ਤੋ। ਇਸ ਵੀ ਜਦ। ਜਦ ਹਰ ਜਨ ਕੇ ਪੀਸਨ ਪੀਸ ਕਬਾਬਾ ਕਿਹਾ ਸੀ ਨਾ। ਪੱਕਾ ਫੇਰ ਨਹੀਂ ਪੜਨੀ ਦਵਾਂ ਹਰ ਜਨ ਕੇ ਪੀਸਣ ਪੀਸ ਕੋ ਉਸ ਵੇਲੇ ਜਿਹੜਾ ਪੀਸਿਆ ਖਾ ਲਿਆ ਸੀ ਬਿੰਦੇ ਬਿੰਦੇ ਨਾ ਚਬ ਲਿਆ ਖਾ ਲਿਆ ਸੀ ਬਾਕੀ ਉਹ ਪੀਸ ਕੇ ਰੱਖ ਲਿਆ ਸੀ ਲੋਕਾਂ ਵਾਸਤੇ ਸੁਬੇ ਕਾਸ਼ੀ ਦਾ ਚੱਕੜ ਜੇ ਡੱਟਿਆ ਹੋਵੇ ਤੇ ਨਹੀਂ ਕੋਈ ਗਾਹ ਕਰੀ اے مایا مو دے چکڑ جستا لے آ کے میں آیا مجھے دے اندر چکڑے ہیں اینو جوڑ دا پورا لایا ہو ور وی صاحب نے گانشیاں سنن پرانی سنگتی پائی دے ਜਾ ਰਹਿਨੇ ਚੱਕੜ ਚਾਉਂ ਤੇ ਜਤਨਾ ਦਾ ਵੀ ਥਾਲੋ ਭਾਈ ਜਿਤੇ ਕੋ ਜੀਵ ਰਹੂ ਫਾਇਦਾ ਹੋ ਪਤਾ ਕੀੜਾ ਉਹਨੂੰ ਉੱਥੇ ਛਾੜ ਦਿੰਦਾ ਨਾਲੇ ਆ ਕੀੜਾ ਨਾਲੇ ਚੋ ਹੀ ਖਾਂ ਰਖਤੇ ਜਿਹੜਾ ਜਨਵਰ ਹਣੇ ਰਸਤੋਂ ਵੜ ਅਸੀਂ ਰਹਿਨੇ ਆ ਸਿਤ ਸਰਵਣ ਦੇ ਭਈ ਦੇ ਪਾਣੀ ਪਾਪਕ ਤੇ ਨੇ ਪਾਣੀ ਦੇ ਦੋਤੋਂ ਤੇ ਮਾਇਆ ਆ ਜਾਂਦਾ ਸਾਪ ਦਾ ਗੁਰੂ ਹੈ ਪੱਕਾ ਹੋ ਚੱਕੜ ਤਾਂ ਹੋ ਗਿਆ ਉਹ ਵਿੱਚ ਉਹ ਅਗਰ ਨਾਲ ਉਹ ਹੈ ਉਹ ਸਰੀਰ ਮਾਇਆ ਇਹਦਾ ਨਾ ਹੋ ਹੈ ਮਾਇਆ ਗਿਆ ਅਗਰ ਨਾਲ ਉਹ ਹੈ ਤੇ ਚਾਹੁੰਦਾ ਸ਼ਾਂਤੀ ਛੱਡ ਅੱਗ ਤੋਂ ਜਫੀ ਨਹੀਂ ਛੱਡਦਾ ਕਹਣਾ ਨੂੰ ਸ਼ਾਂਤੀ ਕਿਉਂ ਉਹ ਪੁੱਛ ਲੋ ਜੇ ਕਹੇ ਇਹ ਝੜਦੇ ਨਹੀਂ ਇਹ ਤਾਂ ਇਹ ਤਾਂ ਸਾਨੂੰ ਸ਼ਾਂਤੀ ਜੈਦੀ ਹੈ ਇਹ ਵੀ ਹੈ ਸ਼ਾਂਤੀ ਦੀ ਵੱਲੋਂ ਸੰਕਟ ਜੀ ਨੋਬ 15 ਜਦ ਇਹ ਹਮ ਦੇਖਤਾ ਹੈ ਡੂਵਲ ਆਪ ਦੇਖਿਆ ਤਾ ਡੂਵਲ ਇਹ ਕਹਿੰਦਾ ਜਦ ਮੈਂ ਦੇਖਿਆ ਇਹ ਤਾਂ ਚੱਕਰ ਜਿਹੀ ਥੱਲੇ ਥੱਲੇ ਜਾਂਦੀ ਆ ਦੱਸੇ ਪਤਾ ਹੀ ਨਹੀਂ ਥੱਲੇ ਥਾ ਇਹ ਨਹੀਂ ਜੱਕੜ ਕੇ ਕਿਉਂ ਜਾਂਦੇ ਆ ਮਨ ਇੱਕ ਵਜੇ ਮੂਰ ਮੰਨ ਕੋੜ ਮੰਨ ਹਰ ਬਿਸਰਾ ਤੇਰੇ ਗੁਣ ਗਰੀਓ ਤੂੰ ਤਾਂ ਪਾਣੀ ਤੇ ਵੀ ਰੋਹੀ ਜਾਂਦਾ ਤੇ ਤੂੰ ਤਾਂ ਪਾਣੀ 'ਚ ਡੁੱਬ ਸਕਦਾ ਤੇ ਤੂੰ ਆਦਰ ਨਹੀਂ ਜਾਣ ਸਕਦੀ ਓਥੀ ਦੀ ਜੈਨੂ ਆਗ ਨਹੀਂ ਆਉਦੀ ਹਵਾ ਲੂ ਲਿਆਉਦੀ ਹਵਾ ਅਗ ਜ ਆਉਦੀ ਹਵਾ ਅਗ ਨਹੀਂ ਜਾਂਦੀ ਕੌਪਰਨ ਰੂਪ ਹੋਇਆ ਜਾਵੰਗ ਥੱਲੇ ਮਾਰਹਾ ਵਾ ਪਾਣੀ ਤੋਂ ਬਾਹਰ ਹੋ ਗਿਆ ਜੀ ਪਾਣੀ ਜਾਏ ਜਿਸ ਨੂੰ ਤੇਰੇ ਪਵਨ ਸਾਜਿਆ ਪਾਣੀ ਤੇ ਸਰਪ ਜਦ ਤੇਰੇ ਪਵਨ ਦਾ ਜਲ ਉਹ ਵੀ ਹਵਾ ਤਾਂ ਹੈ ਤਾਂ ਨਹੀਂ ਆਹ ਪਾਣੀ ਪਤਾ ਪਾਣੀ ਤੋਂ ਬੜੇ ਨੇ ਹੀ ਹੈ ਪਾਣੀ ਨਾਲ ਬੁਲਬੁਲਾਈ ਹੈ ਦਾ ਪੀਤਾ ਪਾਣੀ ਮਾਤਾ ਦਾ ਮਾਤਾ ਜਿਹੜੀ ਮਿੱਟੀ ਹੈ ਉਹਨੇ ਮਾਂ ਮਾਂ ਆ ਖਾਣੋ ਪੀਣੇ ਕਿਉਂ શરીਰ ਦਾ શરીਰ ਦਾ ਖਾਣੋ ਪੀਣੇ ਕਰਦਾ ਹੁੰਦਾ ਇਹੋ ਪਪਨ ਕੀ ਹੈ ਇਹ ਤਾਂ ਗੁਰੂ ਆ ਜਾਂ ਪਬਲਿਕ ਦਾ ਥੱਪਾ ਰક્ત ਬੂਹੂ ਦਾ ਨੋਰਾ ਪਬਲਿਕ ਦਾ ਟਾਇਰ ਤੇ ਭਰੀ ਆ ਤਾਂ ਲੋੜੇ ਤੀਉਂ ਤਾਂ ਚੱਕ ਜੀਏ ਜੇ ਹਵਾ ਹੋਵੇ ਇਸ ਲਈ ਲੋੜੇ ਚੱਕਦਾ ਤਾਂ ਹਵਾ ਹੋਵੇ ਹਵਾ ਨਿਕਲ ਗਈ ਗਿਆ ਇਹ ਆਪਣਾ ਲੋਡ ਬਟੀ ਚੱਕਦਾ ਜੇ ਤਾਂ ਥੱਲੇ ਵਹਿ ਜਾਂਦਾ ਖਾਲੀ ਗੱਡੀ ਥੱਲੇ ਵਹਿ ਜਾਂਦੀ ਹੈ ਸਾਦ ਕੇ ਸੰਗੀ ਨਹੀਂ ਕੁਛ ਥਾਲ। ਕੌਮਨ ਕਹਾ ਥੰਮਾ ਰਸਤੂ ਭੂਮਿਕਾ ਗਾਰਾ ਹੁਣ ਕਿੰਨੇ ਦੱਤ ਰਹਿ ਗਏ ਥੱਲੇ। ਕੌਣ ਜ਼ਰੂਰੀ ਹੈ? ਇਹੋ ਸਟੈਂਡ ਕਮ ਲਾਉਸਤੇ। ਰੋਕਿਆ ਹੋਇਆ ਏ ਡਰਣ ਸੇ। ਥੱਲੇ ਦਬ ਜੂਗਾ। ਸਵਨ ਰੂਪ ਹੋਏ ਜਾਵਾਂਗੇ ਕਿ ਸਮਾ ਇਨਸਾਨ ਰੂਪ ਹੋਏ ਜਾਵਾਂਗੇ ਸਵਨ ਰੂਪ ਜਾਂ ਬਵਨਾ ਹਮੇਸ਼ਾ ਕਾਚ ਰਹਿੰਦੀ ਹੈ ਜਾ ਕੇ ਪਾਣੀ ਤੋਂ ਪਾਣੀ ਰੂਪ ਵਾਜਿਆ ਆਜਿਨ ਦਵਾਸ ਆਉਦਾ ਆਜਿਨ ਰਹਿੰਦੀ ਹੈ ਜਾਮੇ ਗੇਰ ਰੂਪ ਹੋਏ ਜਾਵਾਂਗੇ ਸੇਰ ਛੱਡ ਕੇ ਪਾਣੀ ਚੋਂ ਨਿਕਲ ਗਏ ਪਾਣੀ ਚੋਂ ਨਿਕਲ ਗਏ ਆ ਰੂਪ ਹੋ ਗਈ ਅਕਾਚਰਾਨਗੇ ਜਿਹੜਾ ਤੋਂ ਪਾਣੀ ਰੂਪ ਹੋ ਗਈ ਸਰ ਸਰ ਕਦੇ ਨਹੀਂ ਅੱਥੇ ਉੱਥੇ ਸਾਰੇ ਜਿਵੇਂ ਪਾਪਾ ਇਹ ਨੂੰ ਤਾਂ ਪਾਉਣੇ ਮੈਂ ਪਾਉਣ ਨੂੰ ਸਮਾਇਆ ਉਸ ਪਾਉਣ ਮਾਣਵਾ ਓਏ ਹਾਂ ਦਰ ਵਾਲੀ ਹਵਾ ਜਿਹੜੀ ਪਾਉਣੇ ਮੈਂ ਆਹੋ ਜਦੋਂ ਸਾਹ ਬਾਹਰ ਕੱਢਿਆ ਬਾਹਰ ਹਵਾ ਸਮਾ ਗਿਆ ਉਥੇ ਜੋਤੀ ਆ ਬੰਵਾਸ ਤੇ ਜੋਤੀ ਜੋਤੀ ਜੋ ਉਤਰ ਆਲੀ ਜੋਤੀ ਮੈਂ ਜੋਦੜ ਗਿਆ ਉਸੇ ਮੈਂ ਜੋਦੜ ਗਿਆ ਮਾਟੀ ਮਾਟੀ ਹੋਈਏ ਸੋ ਉਹ ਜੋਤੀ ਆ ਬੰਵਾਸ ਤੇ ਉੱਥੇ ਆਇਆ ਹੋਇਆ ਜੋਤੀ ਮੈਂ ਜੋਦੜ ਬਾਹਰ ਕੋਈ ਸਾਹ ਉਹਦਾ ਸੀ ਕਿਆ ਸਾਹ ਲੈਣ ਵਾਲਾ ਸੀ ਉਹ ਤਾਂ ਬਾਹਰ ਖਿੱਚ ਦੇ ਉਹ ਆਨੇ ਥੱਲੇ ਵੀ ਮਾਰ ਹਵਾ ਬਾਜ ਜਾਊ ਫਕਾਜ਼ ਹਵਾ ਰਹੂਗੀ ਉਸ ਔਰ ਵੀ ਰਹੇ ਆਕਾਚੇ ਰਹੂ ਡਰ ਜੂਏ ਕਾਚੇ ਬਿਆਵਾ ਹੂੰ ਆਕਾਚੇ ਸੀ ਉਹਨੇ ਕਾਜ਼ ਨਹੀਂ ਕਾਜ਼ ਹੁੰਦਾ ਪਾਣੀ ਜਗ੍ਹਾ ਜਦੋਂ ਅਸੀਂ ਠੋਸ ਲੱਕੜ ਜਿਨੀ ਭਾਵਾ ਭਰਦੀ ਜਿੱਥੇ ਉਹਨੂੰ ਹੋਰ ਸਪੇਸ ਮਿਲੀ ਉੱਥੇ ਭਰੂ ਹਾਂ ਤੁਹਾਡੇ ਬਾਹਰ ਦੇ ਵਿੱਚ ਸਪੇਸ ਹੁੰਦੀ ਹੈ ਉਹ ਆਕਾਸ਼ ਹੈ ਸਾਡੇ ਆਕਾਸ਼ ਦੀ ਉਹ ਜਿੱਥੇ ਜਿੱਥੇ ਉਹ ਉੱਥੇ ਹਵਾ ਸਾਡੇ ਹੁੰਦੀ ਹੈਗਾ ਸਦਰ ਹੁੰਦੀ ਹੈ ਉਹ ਸਾਡੇ ਪੜੀ ਚੋਂ ਪੈਦਾ ਹੋਈ ਹੋਈ ਹੈ ਉਹ ਸਾਡੇ ਜੇ ਸਪੇਸ ਆ ਉੱਥੇ ਹੁੰਦੀ ਆ ਵਾ ਤੇ ਜਿਹੜੀ ਸਾਰੀ ਮਗਲ ਹੈ ਇਹ ਲੱਗੀ ਜਾ ਇਹ ਫੇਰੇ ਜਾਂਦੀ ਇਹ ਲੱਗੀ ਇਹ ਫੇਰੇ ਜਾਂਦੀ ਹਾਂ ਉਹ ਜਿਹੜਿਆ ਆਲ ਨਾਲੇ ਆਪਣਾ ਹੌਸਟਰ ਹੈ ਨਾ ਦਰ ਗਰਮੀ ਨਾਲ ਹੌਸਟਰ ਵੀ ਕਿਸੇ ਨੂੰ ਨਹੀਂ ਦਈਏ ਪਰਦਾ ਆ ਜਿਵੇਂ ਹੁੰਦੀ ਹੈ ਅੰਦਰ ਬੇਟੇ ਜਾ ਗਰਮੀ ਹੋ ਗਏ ਹੋ ਇਹਨਾਂ ਦਰਵਾਜ਼ਾ ਪੜਨਾ ਤੇ ਚਲੋ ਆਪਾਂ ਘੜਾ ਡਾਕਟਰ ਹੀ ਕੱਢੀਏ ਬਣ ਉਹ ਲੱਗ ਜੀ